ਸ਼ਲੋਕ ਮਹੱਲਾ ਚੋਥਾ ਹੌ ਟੁੰਢੇਂ ਦੀ ਸੱਜਣਾ ਸੱਜਣ ਮੈਂਡੇ ਨਾਲ ਜਨ ਨਾਨਕ ਅਲੱਖ ਲਖੀ ਲਖੀਐ ਗੁਰਮੁਖੀ ਦੇਹ ਦਿਖਾਲ ਹੌ ਟੁੰਢੇਂ ਦੀ ਸੱਜਣਾ ਕਨੇ ਮਾਇਆ ਵੀ ਸੱਜਣ ਨੂੰ ਟੁੱਟਦੇ ਫਿਰਦੇ ਰਹੀਓ ਚਲ ਪਤਾ ਲੱਗਿਆ ਬਾਹ ਡੋਲਦੀ ਸੀ ਬਾਹਤਾ ਸੱਜਣ ਹੁੰਦਾ ਕੋਈ ਸੱਜਣ ਮੈਂਡੇ ਪਤਾ ਲੱਗਿਆ ਸੱਜਣ ਸਾਹਿਬ ਬਿਰਨ ਆ ਲਈ ਹੈ ਜਦ ਆਪਣਲੇ ਗਰਵਾਂ ਜਿਹਾ ਰੀਵਾ ਕਰਕੇ ਦੇਖੇ ਤਾਂ ਅੰਦਰੋਂ ਖੋਜੇ ਤਾਂ ਸੱਚੀ ਸੀ ਫਿਰ ਕਦੀ ਮੈਨੋਂ ਹੋਰ ਤੇ ਪਤਾ ਲੱਗਿਆ ਜੇ ਅੰਦਰੋਂ ਦਿਖਾ ਤਾਨੂੰ ਮੇਲ ਕਰਾਤਾ ਜਨ ਨਾਨਕ ਅਲੱਖ ਨਾ ਲਖੀ ਹੈ ਉਹ ਕਹਿੰਦੇ ਅਲੱਖ ਹੈ ਤਾਂ ਅਖਾਨਾ ਦਾ ਦੀਨ ਨਹੀਂ ਬਾਹਰ ਖਾਸ ਨੂੰ ਰੋਲਦੇ ਸੀ ਉਹ ਜਿਹੜਾ ਦਿਖਦਾ ਹੀ ਨਹੀਂ ਬਾਹਰ ਉਹ ਬਾਹਰ ਹੈ ਉਹ ਨਹੀਂ ਜਿਹੜਾ ਖਾਨਾ ਦੀ ਬਾਹਰ ਹੈ ਈ ਨਹੀਂ ਫਿਰ ਇਹ ਬਾਹਰ ਹੈ ਤਾਂ ਉਹਦਾ ਦਰਸ਼ਨ ਹੋਏ ਨਹੀਂ ਸਕਣਾ ਤੁਹਾਨੂੰ ਬਾਹਰ ਦਾ ਫਰਾਉਡੀ ਜਿਹਾ ਬਣਾਇਆ ਹੋਇਆ ਬਾਹਰ ਨਹੀਂ ਹੁੰਦਾ ਜੇ ਆ ਨਾਨਕ ਅਲਖ ਨਾ ਲਖੀ ਹੈ ਬਾਹਰ ਕਿਸੇ ਨੇ ਨਹੀਂ ਦੇਖਿਆ ਤੇ ਬਾਹਰ ਹੈ ਹੀ ਨਹੀਂ ਅਲਖ ਹੈ ਜੇ ਫਿਰ ਦਰਸ਼ਨ ਹੋਈ ਨਹੀਂ ਸਕਦੇ ਬਾਕੀ ਸਭ ਝੂਠ ਹੈ ਦਰਸ਼ਨ ਹੋਏ ਭਲਾ ਨਾ ਹੋਇਆ ਬਾਹਰ ਹੁੰਦਾ ਗੁਰਮੁਖੀ ਦੇਖਾਲ ਗੁਰਮਖਾਨੇ ਦੇਖਾਲ ਤਾਂ ਕਰੋ ਕੋਈ ਗੁਰਮਖ ਦੇਖਾਲ ਜਾਂਦਾ ਹੁੰਦਾ ਹੈ ਗੁਰਬਾਨੀ ਦਿਖਾੜੇ ਲਈ ਹੈ ਹੋਰ ਕੀ ਕਰੀਏ ਗੁਰਬਾਨੀ ਅੰਤ੍ਰੋਈ ਦਰਸ਼ਨ ਕਰਾ ਰਹੀ ਹੈ ਹਾਂਜੀ ਠੀਕ ਹੈ ਜੀ ਇਸ ਤਰ੍ਹਾਂ ਦਾ ਸ਼ਲੋਕ ਪਹਿਲਾਂ ਵੀ ਜੀ ਕਿਤੇ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਚ ਆਉਂਦਾ ਜੀ 101 ਵਾਂ 121 ਵਾਂ ਸ਼ਲੋਕ ਹੈਗਾ ਹੌਂ ਟੁੰਢੇਂਦੀ ਸੱਜਣਾ ਸੱਜਣ ਮੈਂਡੇ ਨਾਲ ਸਿਰਫ ਆਉਂਦਾ ਹੈਗਾ ਨਾਨਕ ਅਲੱਖ ਨਾ ਲਖੀ ਹੈ ਗੁਰਮੁਖੀ ਦੇਹ ਦਿਖਾਲ ਇੱਥੇ ਇਹਨਾ ਫਰਕ ਹੈ ਕਿ ਇੱਥੇ ਲਿਖਿਆ ਹੋਇਆ ਜਨ ਨਾਨਕ ਅਲਖ ਨ ਠੀਕ ਹੈ ਫਰਕ ਉਹ ਦੋ ਜਗ੍ਹਾ ਰੈਪੀਟੀਸ਼ਨ ਨਹੀਂ ਕੀਤਾ ਥੋੜਾ ਫਰਕ ਪਾ ਕੇ ਲਿਖਿਆ ਜਿਹੜੀ ਦੋ ਦੋ ਜਗ੍ਹਾ ਲਿਖਣੀ ਆ ਪੰਕਤੀ ਉਹ ਫੇਰ ਰੈਪੀਟੀਸ਼ਨ ਇਹਦਾ ਉਹਦਾ ਫਰੀਦ ਦਾ ਸ਼ਲੋਕ ਸੀ ਉਹ ਜੇ ਤਾਂ ਠੀਕ ਫਰੀਦ ਦਾ ਉਹ ਸ਼ਲੋਕ ਫੇਰ ਤਾਂ ਉੱਥੇ ਵੀ ਨਾਨਕ ਦੀ ਸੀ ਉਹਨਾਂ ਹਾਂਜੀ ਫਰੀਦ ਦੇ ਖਾਤੇ ਚ ਵੀ ਪਾਇਆ ਸ਼ਲੋਕ ਆਪਣਾ ਵੀ ਇਹਨਾਂ ਦਾ ਸ਼ਲੋਕ ਇਹ ਸੀ ਉੱਥੇ ਫਰਕ ਪਾ ਦਿੱਤਾ ਥੋੜਾ ਜਿਹਾ ਫਰੀਦ ਦੇ ਖਾਤੇ ਚ ਪਾ ਦਿੱਤਾ ਤੇ ਥੋੜਾ ਜਿਹਾ ਫਰਕ ਰੱਖ ਕੇ ਜੋੜਨ ਕਰਕੇ ਲਿਖ ਦਿੱਤਾ ਉੱਥੇ ਹਾਂਜੀ ਉੱਥੇ ਪਹਿਲਾਂ ਆਉਂਦਾ ਜੀ ਤਨ ਤਪੈ ਤਨੂਰ ਜਿਉ ਬਾਲਣ ਦੰਨਤ ਪਾਇਤ ਨੂਰ ਜਿਉ ਬਾਲਨ ਹੱਡ ਬਾਲ ਸਿਰ ਪੈਰੀ ਚਾ ਫੇੜਿਆ ਅੰਦਰ ਪਰੀ ਨਿਹਾਲ ਉਸ ਤੋਂ ਬਾਅਦ ਇਹ ਆਉਂਦਾ ਜੀ ਹੌਣ ਟੁੰਡੇ ਨਾਲ ਨਾਨਕ ਅਲੱਖ ਨਾਲ ਲਖੀਏ ਗੁਰਮੁਖੀ ਦੇ ਦਿਖਾਲ ਕਹੋ ਲੈ ਕੇ ਆਇਆ ਫਰੀਦ ਚੱਕੇ ਸ਼ਲੋਕ ਉਹ ਠੀਕ ਲੈ ਕੇ ਆ ਸੀ ਲੈਣ ਦੇ ਵਿੱਚ ਆ ਸ਼ਲੋਕ 'ਚ ਕੋਈ ਬਾਣੀ ਮੋਟੀ ਹੋਣੀ ਆ ਕبھی ਉਹ ਗੁਰੂ ਸਾਹਿਬ ਨੇ ਪੂਰੀ ਕਰਕੇ ਉਹ ਫਿਰ ਠੀਕ ਕਰ ਦਿੱਤੀ ਠੀਕ ਹੈ ਇਹ ਚੌਥੇ ਪਾਸ਼ਾ ਦਾ ਸ਼ਲੋਕ ਹੈ ਦਾ ਕਹਿਣ ਦਾ ਭਾਵ ਇਹ ਹੈ ਜੀ ਚੌਥੇ ਪਾਸ਼ਾ ਨੇ ਕਦੀ ਪੂਰੀ ਕੀਤੀ ਹੈ ਫਿਰ ਉਹ ਠੀਕ ਹੈ ਜੀ ਉਹਨਾਂ ਕੋਲੇ ਸ਼ਲੋਕ ਉਸ ਸਮੇਂ ਸੀਗਾ ਇਹ ਫਰੀਦ ਬਾਦ ਵਾਲਾ ਫਰੀਦ ਹੈ ਪਹਿਲਾ ਜਿਹੜਾ ਫਰੀਦ ਕਹੀ ਜਾਏ ਉਹ ਪੰਜਾਬ ਤੇ ਸਿੱਖ ਪੰਥ ਦੇ ਬਾਣੀ ਫਰੀਦ ਹੀ ਬਣ ਜਾਣਗੇ ਜੀ ਹਾਂ ਤੇ ਫਰੀਦ ਬਾਦੀ ਹੋ ਸਕਦਾ ਚਲੋ ਕਬੀਰ ਨੇ ਤਾਂ ਕਹਿਤਾ ਮੈਨੂੰ ਕਦੇ ਮਿਲਿਆ ਗਿਆਨ ساری ਕਹਾਣੀ ਦੱਸਤੀ ਸੇਖ ਫਰੀਦ ਨੇ ਦਸੀ ਉਹਦੀ ਗਾਣੀ ਤੈਨੂੰ ਕਿੱਥੋਂ ਪਿਆ ਗਿਆਨ ਠੀਕ ਹੈ ਜੀ ਨਾਲੇ ਸੇਖ ਆ ਸੇਖਾਂ ਨੂੰ ਤਾਂ ਗੁਰਬਾਣੀ ਚ ਕਾਫੀ ਉਪਦੇਸ਼ ਹੈ ਜੀ ਇੱਕ ਤੌਰ ਤੇ ਸੇਖ ਆ ਹੋ ਪਰ ਉਧਰ ਲਾਈਨ ਕੋਈ ਸੰਦਤ ਹੋਈ ਹੈ ਪਤਾ ਲੱਗਿਆ ਉਹ ਰੂਹ ਕੋਲਾਨ ਨੂੰ ਪਤਾ ਲੱਗਿਆ ਹੋਵੇ ਉਹ ਲਾਈਨ ਬਦਲ ਕੇ ਕਿਉਂਕਿ ਲਿਖਦੇ ਆਂ ਜਨਾ ਜੀ ਗੁਰਨਾਨ ਸਿੰਘ ਸਾਹਿਬ ਦਾ ਸ਼ਲੋਕ ਤਾਂ ਪੜੇ ਕਿਤੇਬਾ ਮੁੱਲਾ ਸ਼ੇਖ ਕਹਾਵੇ ਕਿ ਕਿਤੇਬ ਦਾ ਗਿਆਨ ਉਹਨਾਂ ਨੇ ਪਹਿਲਾਂ ਪੜ੍ਹਿਆ ਹੋਇਆ ਹਾਂਜੀ ਹਾਂ ਗੁਰਮਤ ਸਮਝ ਕੇ ਫਿਰ ਨਾਲੇ ਤਾਂ ਉਸ ਗਿਆਨ ਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ ਉਹ ਫਿਰ ਆਹ ਖਾਨਾ ਤੱਕਦਾ ਗਿਆ ਸੀ ਉਹ ਕਵੀ ਉਹ ਕਵੀ ਤੇ ਟਿੱਪਣੀ ਕੀਤੀ ਹੈ ਜਿਹੜੀ ਖਾਨਾ ਵਾਲੀ ਸੀ ਹਾਂਜੀ ਕਿਉਂਕਿ ਆ ਤਾਂ ਲਿਖਿਆ ਉੱਤਮ ਉੱਚੋ ਪਾਰਬ੍ਰह्म ਗੁਣ ਅੰਤ ਨ ਜਾਣੈ ਸੇਖ ਆਹਾਂ ਉਹ ਸੇਖ ਨਹੀਂ ਆਣਦੇ ਠੀਕ ਹੈ ਜੀ ਜਿਹੜੀ ਗੱਲ ਉਹ ਪਾਰਬ੍ਰह्म ਦੀ ਗੱਲ ਚ ਹੈ ਨਹੀਂ ਰੋਵੇਂ ਸੇਖ ਮਸਾਇਕ ਪੀਰ ਆਹਾਂ ਪੁਰਾਣ ਅੰਤ ਕਾਲ ਦਾ ਕੀਤਾ ਰਹਿੰਦੀ ਹੈ ਰੋਜ਼ੇ ਕਿਆਮਤ ਦੇ ਬਾਅਦ ਉਹਦਾ ਹਿਸਾਬ ਫਿਰ ਇਹਨੇ ਭਾਪੇ ਛੋਣ ਉਦੋਂ ਤੱਕ ਤਾਂ ਉਹ ਕਬਰ ਦੇ ਨਾਲੇ ਜੋੜ ਕੇ ਰੱਖਦੇ ਨੇ ਇਹ ਤਾਂ ਸੇਖ ਵੜ ਲਿਖਣ ਦਾ ਕੋਈ ਖਾਸ ਕਾਰਨ ਸੀਗਾ ਗੁਰਬਾਣੀ ਜਿਹੜਾ ਅਜੇ ਆਪਾਂ ਖੋਜਿਆ ਨਹੀਂ ਹੈ ਜੀ। ਕੋਈ ਹਾਂ ਬਿਲਕੁਲ ਬਿਲਕੁਲ। ਤਾਂ ਇਹ ਲਿਖਿਆ ਫੇਰ ਹੈ ਜੀ ਤਿਸ ਕਾ ਕੁੱਠਾ ਹੋਵੇ ਸੇਖ ਵੀ ਜੇ ਸੇਖ ਉਸ ਮਤ ਤੋਂ ਕੁੱਠਾ ਹੋ ਜਵੇ ਸੱਚ ਕੀ ਮਤ ਤੋਂ ਫੇਰ ਲੋਹੂ ਲਭ ਨੇ ਇਕੱਠਾ ਵੇਖ ਫੇਰ ਪਰ ਲੋਭ ਰਤ ਵੀ ਕਿਹਾ। ਹਾਂ ਠੀਕ ਹੈ ਜੀ ਲੋਹੁ ਲੱਭ ਨਿਕੱਤਾ ਵੇਖ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰਦੀਦਾਰ ਸਮਾਏ ਇਹ ਫਿਰ ਉਹਨਾਂ ਤੇ ਘਟਣਾ ਘਟਿਏ ਸ਼ੇਖ ਫਰੀਦ ਜੀ ਹਾਂ ਜੀ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਰਹਿਣ ਨਾ ਜਾਈ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਲਾ ਲਈ ਉਹ ਫਿਰ ਉਹ ਸੱਚ ਦੇ ਬਿਨਾ ਰਹਿ ਨਹੀਂ ਸਕਦੇ। ਤੈਨੂੰ ਸਤ ਕੋਲ ਰਹਿ, ਫਿਰ ਸਤ ਕੋਲ ਰਹਿਣਾ ਜਾਈ। ਫਿਰ ਤੋਂ ਬਿਨਾ ਰਹਿਣਾ ਨਹੀਂ ਜਾਈ। ਫਿਰ ਤੇ ਬਿਨਾ ਹੋ ਰਹਿ ਨਹੀਂ ਸਕਦੇ। ਦੇ ਬਿਨਾ ਉਹ ਨਹੀਂ ਰਹਿ ਸਕਦੀ। ਜਿਹਨੂੰ ਸੱਚ ਨਾਲ ਪ੍ਰੀਤ ਲੱਗੀ। ਉਹ ਆਪ ਅੰਤਰਾਤਮਾਨ ਦੇ ਦੀ ਪ੍ਰੀਤ ਲੱਗੀ ਸੱਚਾਰੇ। ਹੋ ਕੇ ਉਹ ਨਹੀਂ ਰਹਿ ਸਕਦੇ ਫਿਰ ਬਾਹਰ ਦੀ ਕਿਸੇ ਨਾਲ ਪ੍ਰੀਤ ਲੱਗ ਜਾਂਦੀ ਹੈ। ਪੂਰਾ ਪਾਇਆ ਪਈ ਹੈ। ਜਦੋਂ ਮਿਲ ਜਾਂਦਾ ਉਹਨਾਂ ਸੱਚ ਦਾ ਗਿਆਨ ਮਿਲ ਜਾਂਦਾ ਜਾਂ ਕੋਈ ਪੂਰਾ ਸਤਿਗੁਰ ਦਾ ਉਪਦੇਸ਼ ਮਿਲ ਜਾਂਦਾ ਤਾਂ ਪੂਰਾ ਭਾਈਆ ਪੂਰਾ ਗਿਆਨ ਉਹਨਾਂ ਦਾ ਹੋ ਜਾਂਦਾ ਗਿਆਨ ਉਹਨਾਂ ਦੇ ਅੰਦਰ ਚਾਨਣ ਪੂਰਾ ਹੋ ਆ ਜਾਂਦਾ ਉਹਦੀ ਰਤਨਾ ਨੂੰ ਉਹਦੀ ਬੁੱਧੀ ਨੂੰ ਮਨ ਦਾ ਗਿਆਨ ਆ ਜਾਂਦਾ ਹਰ ਦਾ ਗਿਆਨ ਦਾ ਰਸ ਆ ਜਾਂਦਾ ਹਾਂਜੀ ਕੋਈ ਗਾਵੈ ਕੋ ਸੁਣਾਏ ਕੋ ਉਚਰ ਸੁਣਾਵੇ ਜਨਮ ਜਨਮ ਕੀ ਮਲ ਉੱਤਰੇ ਮਨ ਚਿੰਦਿਆ ਪਾਵੇ ਇਹ ਜਿਹੜੀ ਗੁਰਬਾਣੀ ਹੈ 12 ਦੀ ਜਿਹੜੀਆਂ 12 ਨੇ ਇਹ ਆਖਰੀ ਪੌੜੀ ਹੈ 22 12 ਦੀ ਗੁਰੂ ਗ੍ਰੰਥ ਸਾਹਿਬ ਦੀਆਂ ਸੀ ਜਾਣੇ ਗੁਰਬਾਣੀ ਨੂੰ ਕੋਈ ਤਾਂ ਜਾਵੇ ਭਾਈ ਕੋਈ ਥੋੜੀ ਕੋ ਉਚਰ ਸੁਣਾਵੇ ਕੋਈ ਇਹਦੀ ਵਿਆਖਿਆ ਕਰਕੇ ਉਜਾਰ ਕੇ ਸੁਣਾਵੇ ਹੋਰ ਵਿਆਖਿਆ ਕਰਕੇ ਉਚਰ ਸੁਣਾਵੇ ਜਨਵਜਨ ਕੀ ਮਨ ਨੂੰ ਉੱਤਰ ਸਨਾਂ ਦੀ ਉਹ ਸੁਣ ਦਈ ਜਨਵਜਨ ਦੀ ਜਿਹੜਾ ਸੁਣ ਲੈਂਦਾ ਸਮਝ ਲੈਂਦਾ ਉਹਦੀ ਉੱਤਰ ਜਾਂਦੀ ਹੈ ਤੇ ਕੋਈ ਪਰਪਲੀ ਗਾ ਰਿਹਾ ਕੋਈ ਸੁਣ ਰਿਹਾ ਜਾਂ ਕੋਈ ਵਿਆਖਿਆ ਕਰ ਰਿਹਾ ਇਹਦਾ ਕੋਈ ਫਰਕ ਨਹੀਂ ਹੈ ਅਸਰ ਹੈ ਜਿਹਦੇ ਤਾਂ ਹੋ ਗਿਆ ਜਨਵਜਨ ਦੀ ਮਨ ਨੂੰ ਉੱਤਰ ਜਾਂਦੀ ਨਾਲ ਉੱਤਰ ਹੈ ਮਨ ਜਿਹਦੇ ਆਪ ਹੈ ਮਨ ਜਿਹਦੇ ਆ ਮੰਦੀ ਇੱਛਾ ਉਹਦੀ ਪੂਰੀ ਹੋ ਜਾਂਦੀ ਹੈ ਜੋ ਉਸਦੀ ਇੱਛਾ ਉਹ ਪੂਰੀ ਹੁੰਦੀ ਹੈ ਹਾਂਜੀ आवन जाना मेटिए हरके गुण गावै आप तरह संगीत राहे सब कुटुंब तरावै ओदा होना जाना मिल जांदा तोम जानदा हरके कौन गावै ओ हरदे कौन गाउदा रंदा हरदे कौन गाउनी ड्यूटी या है हो लियो कोई काम हैगा एरे नालों पाणा जाना पिंड ਜਿਹੜੇ ਨਾਲ ਜੁੜਦੇ ਨੇ ਉਹ ਤੇ ਉਹ ਵੀ ਤਰ ਜਾਂਦੇ ਨੇ ਆਪ ਦਾ ਸਰਦਾ ਹੀ ਸਰਦਾ ਉਹ ਜਿਹੜੇ ਉਹਦੇ ਨਾਲ ਜੁੜੇ ਰਹਿੰਦੇ ਨੇ ਉਹ ਵੀ ਤਰਦੇ ਸਭ ਕੁੱਟੰਬ ਤਰਾਵੈ ਉਹ ਤਾਂ ਸਾਰੇ ਕੁੱਟੰਬਾਂ ਨੂੰ ਚਾਹੁੰਦੇ ਨੇ ਜਿੰਦੀਆਂ ਵੀ ਮੱਥਾਂ ਨੇ ਸਾਰੇ ਤਰ ਜਾਣ ਪਰ ਜਿਹੜੇ ਛੁੱਟਣਗੇ ਸਰ ਜਾਣਗੇ ਨਹੀਂ ਛੁੱਟਣਗੇ ਉਹ ਰਹਿ ਜਾਣਗੇ ਹਾਂਜੀ ਆਪ ਤਰਹਿ ਸੰਗੀਤ ਰਾਹੀਂ ਸੰਗੀਤ ਆ ਕੀ ਭਾਵੇਂ ਜੀ ਬੁੱਧੀ ਜੀ ਨਾ ਸੰਗੀ ਬਾਹਰ ਲੈ ਆਜਾ ਸਭ ਕੁਟੰਬ ਤਰਾਵੈ ਸਾਰੀਆਂ ਬਤਾਲ ਜਿੰਦਿਆਂ ਨੇ ਉਹਦੇ ਬੰਦੇ ਅਲੱਗ-ਅਲੱਗ ਕੁਟੰਬ ਅਲੱਗ-ਅਲੱਗ ਕੁਟੰਬ ਜਨ ਨਾਨਕ ਤਿਸ ਬਲਹਾਰਣੈ ਜੋ ਮੇਰੇ ਹਰ ਪ੍ਰਭ ਭਾਵੈ ਹਾਂ ਜਨ ਨਾਨਕ ਐ ਨਾ ਜੋ ਮੇਰੇ ਹਰ ਪ੍ਰਭ ਨੂੰ ਭਾਜਵੇਂ ਜਿਹਦੀ ਗੱਲ ਜਿਹਦੀ ਭਗਤੀ ਜਿਹਦਾ ਨਾਮ ਮੇਰੇ ਹਰ ਪ੍ਰਭ ਨੂੰ ਭਾਜਵੇਂ ਜਿਹਦੇ ਗੋਲ ਮੇਰੇ ਹਰ ਪ੍ਰਭ ਨੂੰ ਪਾਉਣ ਉਹਦੇ ਗੁਰਬਾਨ ਹੋਰ ਦੁਨੀਆ ਚ ਸਾਰੀ ਨੂੰ ਭਉਂਦਾ ਹੋਵੇ ਜੇ ਘਾਹ ਆਰਪਰਗ ਨਾ ਪਾਵੇ ਫਿਰ ਮੈਂ ਉਹਦੇ ਗੁਰਬਾਨ ਨਹੀਂ ਜਾ ਸਕਦਾ ਜੀ ਅੱਛਾ ਜੀ ਇੱਥੇ 15ਵੀਂ ਪੌੜੀ ਸਮਾਪਤੀ ਹੈ ਜੀ ਪੋਤੀ ਸਾਹਿਬ ਚ 22 12 ਦਰਜ ਜਿਹੜੀਆਂ ਹੋਈਆਂ ਉਹਨਾਂ ਚੋਂ ਇਹ ਸਭ ਤੋਂ ਅਖੀਰਲੀ ਵਾਰ ਦੀ ਅਖੀਰਲੀ ਪੌੜੀ ਹੈ ਜੀ ਜੀ ਇਹਦੀ ਵੀ ਸਮਾਪਤੀ ਹੈ ਜੀ ਇਹ ਚੌਥੇ ਪਾਸ਼ਾ ਦੀ ਵਾਰ ਹੈ ਤੇ ਸਾਨੂੰ ਇਸ ਗੱਲ ਦੀ ਵੀ ਹਦਾਇਤ ਹੈ ਕਿ ਇਹਨੂੰ ਕਾਂੜੇ ਕੀ ਵਾਰ ਮਹੱਲਾ ਚੌਥਾ ਮੂਸੇ ਤੇ ਇੱਕ ਗੱਲ ਮੈਨੂੰ ਸੋਚਦਾ ਸੀ ਵੀ ਇਹਦੇ ਵਿੱਚ ਸ਼ਬਦ ਦੇ ਅਰਥ ਨਹੀਂ ਆਏ ਕਾਂੜਾ ਸ਼ਬਦ ਦੇ ਕੀ ਅਰਥ ਹੋਣਗੇ ਜੀ ਤੇ ਨੂੰ ਕਿਹਾ ਹੋਇਆ ਹੈ ਉਹਦੇ ਨਾਲੇ ਹੋਣਗੇ ਅੱਛਾ ਜੀ